ਸ਼ਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਇਸ ਕੂੜ ਬੋਲ ਕੇ ਖਵਾਲੀ ਹੈ ਜੇ ਚਲਦਿਆਂ ਨਾਲ ਨਾ ਜਾਏ ਹਾਂਜੀ ਕਾਇਆ ਹੰਸ ਕਿਆ ਪ੍ਰੀਤ ਹੈ ਕਾਹਦੀ ਪ੍ਰੀਤ ਹੈ ਜਿਹੜੀ ਕਾਇਆ ਪੈਰੋਂ ਹੰਸ ਛੱਡ ਜਾਂਦਾ ਫੇਰ ਕੀ ਕਰਦਾ ਜੀਉਦਾ ਉਹਦਾ ਜੇ ਨਾ ਹੂੰ ਜਿਹਨਾਂ ਕਾਇਆ ਨਾਲ ਜੁੜਿਆ ਹੁੰਦਾ ਇਹਨੂੰ ਝੂਠ ਬੋਲ ਬੋਲ ਕੇ ਖੋਲਦਾ ਕਸੂਰ ਕਾਇਆ ਦਾ ਘਟਿਆ ਕਹਿੰਦਾ ਚੱਲਦਾ ਹੰਸ ਕਾਇਆ ਨਾਲ ਹੀ ਹੰਸ ਹੈ ਨਾ ਇਹੂ ਠੀਕ ਹੈ ਪਰ ਨਾਲ ਤਾਂ ਹੰਸ ਕਰਦਾ ਕਾਇਆ ਸਾਥ ਦੀਰੀ ਕਸੂਰ ਕਾਇਆ ਦਾ ਹੈ ਪੀਤ ਹੰਸ ਜ਼ਰੂਰ ਕਰਦਾ ਕਾਇਆ ਨੂੰ ਪਰ ਕਾਇਆ ਨਹੀਂ ਕਰਦੀ ਆ ਤੇ ਜਿਹੜਾ ਕਾਇਲ ਜੜ ਜੀ ਜਿਹੜੀ ਕੀ ਪ੍ਰੀਤ ਕਰੀ ਜੀ ਠੀਕ ਹੈ ਜੀ ਜੇ ਤਾਂ ਚੀਜ਼ ਪ੍ਰੀਤ ਕਰੂਗੀ ਜੇ ਤਾਂ ਹੀ ਵਿਰੋਧ ਕਰੂਗੀ ਉਹ ਬੜਾ ਦਾ ਸੰਬੰਧ ਚੇਤਨ ਨਾਲ ਹੈ ਚੜ ਨਾਲ ਦੀ ਉਹ ਕੋਣ ਜਿਆਦਾ ਲੈ ਵੀ ਬੋਲਦੇ ਰਹੇ ਹੋ ਹੋਰ ਤਰ੍ਹਾਂ ਦੇ ਜਿਵੇਂ ਸੁਭਾਅ ਹੁੰਦੇ ਨੇ ਕੋਈ ਗਲਤ ਚੀਜ਼ ਆਏ ਕੋਈ ਸਦਗੀ ਜਾਂ ਲਾਉਂਗਾ ਸਵਾਗਤ ਹੈ ਮੈਂ ਇਹਨਾਂ ਨੇ ਅਟਾ ਗੁੜੀ ਮੈਂ ਉਹ ਗੱਲ ਹੋਰ ਹੈ ਚੇਤਨ ਹੈਗਾ ਇਹ ਕਾਇਆ ਵਾਸਤੇ ਝੂਠ ਬੋਲ ਕੇ ਝੂਠ ਬੋਲ ਰਿਹਾ ਤੇ ਉਹ ਉਹਦਾ ਨਿਰਵਾਣ ਚ ਪਾਲਣਾ ਕਰ ਰਿਹਾ ਚੰਗਾ ਬੁਕਾਰ ਠੀਕ ਹੈ ਪਰ ਉਹ ਫਿਰ ਜਾਂਦੇ ਆ ਇਹਦੇ ਨਾਲ ਨਹੀਂ ਜਾਂਦੀ ਉਹ ਰਹਿ ਜਾਂਦੀ ਉਹ ਤੇਰੇ ਅਗੇ ਕਾਲੀ ਬ੍ਰਿੰਦਾ ਫਿਰ ਠੀਕ ਹੈ ਜੀ ਕਾਇਆ ਮਿੱਟੀ ਅੰਧ ਹੈ ਪਾਉਣੇ ਪੁੱਛੋ ਜਾਏ ਹਉ ਆਵਾ ਜਾਏ ਕਾਇਆ ਜਿਹੜੀ ਮਿੱਟੀ ਹੈ ਤਾਂ ਹੁੰਦਾ ਹੈ ਇਹਨੂੰ ਨੂੰ ਦੇਖਣ ਵਾਲਾ ਕੋਈ ਹੋਰ ਹੈ ਦੇ ਅੱਖਾਂ ਦਾ ਦੇ ਗਾਣ ਹੈਗੀਆਂ ਜਰੂਰ ਲੱਗੀਆਂ ਹੋਈਆਂ ਅੱਖਾਂ ਦੀਆਂ ਅੱਖਾਂ 'ਚ ਕੋਈ ਹੋਰ ਦੇਖਦਾ ਦੇਖਣ ਵਾਲਾ ਹੰਸ ਦੇਖਦਾ ਦੇਖਣ ਵਾਲਾ ਹੰਸਾ ਤੁਨਹੀਂ ਦੇਖਦਾ ਅੱਖਾਂ ਤਾਂ ਇਹਨਾਂ ਕਹਿ ਤਾ ਆਇਆ ਤਾਂ ਨਹੀਂ ਹੁਦੀ ਹੈ ਮਿੱਟੀ ਕਾਇਆ ਮਿੱਟੀ ਅੰਧ ਹੈ ਇਹ ਅੰਦੀ ਵੀ ਹੈ ਗੋਲੀ ਵੀ ਹੈ ਇਹ ਸੁਣਨ ਵਾਲਾ ਵੀ ਕੋਈ ਹੋਰ ਹੈ ਸੁਣਨ ਵਾਲੀ ਸ਼ਕਤੀ बच्याल वाली शक्ति समिया वाली शक्ति ओ लग बैठी है।, है ये दाया दा मिट्टी मिट्टी तो, तो बाद है, है। मिट्टी है चाहे संसार तो बाद हंस है ਜੋ ਦੇ ਵਿੱਚ ਹੰਸ ਫਰਦਾਨ ਦੇਖਦਾ ਉਹ ਨੂੰ ਜਿੰਦਾ 11 ਦਾ ਪਿੱਛੋਂ ਆਇਆ ਅੰਨਿਆ ਹੱਥ ਤੋਂ ਬਾਦ ਧਿਆਨ ਛੱਡ ਜਾਂਦਾ ਫੇਰ ਅੰਨਿਆ ਹੈ ਠੀਕ ਹੈ ਜੀ ਹਾਂ ਉਸ ਤੋਂ ਪਹਿਲਾਂ ਤਾਂ ਕਹਿਣ ਡਰਾਈਵਰ ਬੈਠਾ ਇਹਨੂੰ ਚਲਾ ਰਿਹਾ ਜਾਂ ਡਰਾਈਵਰ ਚਲੇਗਾ ਫੇਰ ਇਹਦਾ ਵਾਹ ਫੇਰੇ ਮਿੱਟੀ ਠੀਕ ਹੈ ਜੀ ਹੋਂ ਤਾਂ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਮੈਂ ਤਾਂ ਮਾਇਆ ਫਸਿਆ ਹਾਂ ਇਹ ਜੀ ਠੀਕ ਹੈ ਜੀ ਉਹਦੇ ਕਿ ਆਇਆ ਤੇ ਮਿੱਟੀ ਨਾਲ ਕਿਉਂ ਜੁੜ ਗਿਆ ਸੀ ਜਾ ਕੇ ਉਹ ਮੈਨੂੰ ਮੋਹ ਹੀ ਰੋਜ਼ੀ ਦੇਦਾ ਮੈਨੂੰ ਕਿਉਂ ਇਤਰਾਜ ਹੈ ਇਸ ਦਾ ਕਿ ਮੈਨੂੰ ਝੂਠ ਬੋਲ ਬੋਲ ਕੇ ਖਵਾਇਆ ਝੂਠ ਬੋਲ ਬੋਲ ਕੇ ਪਾੜਿਆ ਝੂਠ ਬੋਲ ਬੋਲ ਕੇ ਇਹਦੀ ਤੰਦਰੁਸਤੀ ਬਾਸਤੇ ਸਭ ਕੁਝ ਕੀਤਾ ਮੈਨੂੰ ਛੱਡ ਗਈ ਉੱਥੇ ਹੀ ਰਹਿ ਗਈ ਮੇਰੇ ਨਾਲ ਨਹੀਂ ਗਈ ਮੈਨੂੰ ਅਸਰਾਜ ਕਿਹੜੀ ਗੱਲ ਦਾ ਮੈਨੂੰ ਇਹਦਾ ਮੋਹ ਸੀ ਮੇਰਾ ਸਾਥ ਦੇਊਗੀ ਮੈਨੂੰ ਵੀ ਪਰਪੇ ਸੀ ਹੈ ਮੈਂ ਮਾਲ ਸੀ ਮਨੋਂ ਮੈਂ ਮੰਦਾ ਜੀ ਦੀ ਹੈ ਮੇਰੇ ਨਾਲੇ ਰਹੂ ਉਹ ਮੋਹ ਕਰਕੇ ਮੈਂ ਬਾਲਦਾ ਜੇ ਮੋਹ ਨਾ ਹੁੰਦਾ ਮੈਂ ਵੀ ਕਹੂਗੀ ਬੰਦੇ ਰਹਿਣ ਤੇ ਸਾਰੇ ਅਪਰਾਧ ਮੋਹ ਕਰਕੇ ਕੀਤੇ ਨੇ ਜੂਰ ਬੋਲ ਕੇ ਜਿਹੜਾ ਰੂਹ ਹੋਵੇ ਉਹਨੂੰ ਮਹਿਸੂਸ ਉਹ ਨਾ ਉਹ ਜਿਹੜਾ ਬਹੁਤ ਸੀ ਨਾ ਮੇਰਾ ਗਲਤੀ ਉਹਦੇ ਕੇ ਕੇ ਇਹ ਫੇਰ ਸਾ ਛੱਡ ਗਈ ਕਈ ਆ ਵੀ ਲੋਕਾਂ ਨੇ ਸੁਣਿਆ ਵੀ ਇਹਨੇ ਛੱਡ ਜਾਂਦੀ ਹੈ ਹੁੰਦੀ ਵਿਸ਼ਵਾਸ ਇਹ ਕੀਤਾ ਸੁਣਦੇ ਵੀ ਰਹੇ ਪੜ੍ਹਦੇ ਵੀ ਰਹੇ ਪਰ ਉਸਾਈਂ ਕੀਤਾ ਨਾਨਕ ਹੁਕਮ ਨਾਲ ਜਾਤੋਂ ਖਸਮ ਕਾ ਜੇ ਰਹਾ ਸਤ ਸਮਾਇ ਨਾਨਕ ਤਾਂ ਖਸਮ ਨੇ ਹੁਕਮ ਨੂੰ ਨਹੀਂ ਜਾਣਿਆ ਜਿਹਦੇ ਵੀ ਜਾਣ ਲੈਂਦਾ ਫਿਰ ਕਾਇਆ ਨੂੰ ਛੱਡ ਕੇ ਹੁਕਮ ਦੇ ਵਿੱਚ ਨਸਮਾਇਆ ਰਹਿਦਾ ਇਹਨੂੰ ਪਹਿਲਾਂ ਹੀ ਦਿੰਦਾ ਦਵਾਉਂਦੀ ਉਹ ਬਾਣੀ ਕਹੀ ਸੀ ਸੁਣੀ ਸੀ ਇਹ ਪਰਮੇਸ਼ਰ ਦਾ ਹੁਕਮ ਸੀ ਇਹਨੂੰ ਜਾਣਿਆ ਵੀ ਇਹ ਕਹੀ ਕਿਨੇ ਸਮਝਾਇਆ ਵੀ ਸੀ ਕਿ ਆ ਵੀ ਸੀ ਸੱਤ-ਸੱਤ ਕਰਕੇ ਮੰਨੋ ਗੁਰ ਸਿੱਖੋ ਇਹ ਕਰਤੇ ਪੁਰਖ ਨੇ ਇਹ ਗੱਲ ਤੇ ਵੀ ਵਿਸ਼ਵਾਸ ਨਹੀਂ ਕੀਤਾ ਹੋਰਦੋ ਗੱਲ ਦਾ ਉਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਕਿ ਖਸਮ ਦੇ ਹੁਕਮ ਨੂੰ ਜਾਣ ਲੈਦਾ ਵੀ ਗੁਰਬਾਨੀ ਖਸਮ ਦਾ ਹੁਕਮ ਕਿਉਂ ਇਵਰਾਜ਼ ਕਰਦਾ ਕਿਉਂ ਝੂਠ ਬੋਲਦਾ ਕਿਉਂ ਕਾਇਆ ਪਾਲਦਾ ਕੀ ਲੋੜ ਤੇ ਲੋਕਾਂ ਨੂੰ ਝੂਠ ਬੋਲ-ਬੋਲ ਕੇ ਕਰੋੜ ਰੁਪਈਏ ਦੀਆਂ ਕਾਰਾਂ ਦੇ ਵਿੱਚ ਸੰਤ ਦੀ ਲਾਲ ਬਤੀ ਜਗਾਉਂਦੀ। ਉਹਦੇ ਆਵੇਂ ਮੇਰੀਓ ਆ ਮੇਰੇ ਨਾਲ ਰਹੂ। ਜੇ ਇਹ ਇਕ ਪਰੋ ਸਾਰੇ ਝੂਠਾ। ਝੂਠੇ ਪਰੋਥੇ ਵਿੱਚ ਮਰਿਆ। ਠੀਕ ਹੈ ਜੀ। ਮਹੱਲਾ ਤੀਜਾ ਇੱਕੋ ਇਸ ਧਨ ਕੋ ਤਸਕਰ ਜੋ ਨਾ ਸਕਈ ਨਾ ਉਹ ਚੱਕਾ ਲੈ ਜਾਏ ਦੁਨੀਆਂ ਦੇ ਵਿੱਚ ਇੱਕ ਧਨ ਸੱਚ ਹੋਰ ਨਾ ਧਨ ਸੱਚਾ ਧਨ ਬਾਕੀ ਧਨ ਵੀ ਹੈਗੇ ਆ ਮਾਇਆ ਕਹਿੰਦੇ ਆ ਮਾਇਆ ਦੇ ਧਨ ਵੀ ਹੈਗੇ ਨੇ ਉਹ ਚੋਰੋ ਝੱਕੇ ਦੀਆਂ ਲੈ ਜਾਂਦੇ ਨੇ ਗਿਆਨ ਚੁਰਾਏ ਵੀ ਜਾਂਦੇ ਨੇ ਕਿਤਾਬਾਂ ਵੀ ਚੁਰਾਈਆਂ ਜਾਂਦੀਆਂ ਨੇ ਉਹਦੇ ਦਾਖੀ ਬਹੁਤ ਉਹ ਫੀਸਾਂ ਦੇ ਕੇ ਵੀ ਪੜ੍ਹਦੇ ਨੇ ਲੋਕ ਪਰ ਇਹ ਤਾਂ ਬਣਾ ਵੀ ਇਸੇ ਲਈ ਪੜ੍ਹਦੇ ਨੇ ਤਾਂ ਸੱਚ ਨੂੰ ਤਾਂ ਜਾਨਣ ਦੀ ਕੋਸ਼ਿਸ਼ ਕਰਦੇ ਫਰੀਮ ਨਹੀਂ ਕੋਈ ਲੈਂਦਾ ਪਰ ਦੂਜੇ ਗਿਆਨ ਨੇ ਸੁੱਧਾਰੇ ਗਿਆਨ ਹੋਰ ਉਹ ਚੋਰੀ ਵੀ ਕਰਦੇ ਨੇ ਲੋਕ ਦੂਜੇ ਦਾ ਦੂਜਾ ਗਿਆਨ ਚੋਣ ਕਰਕੇ ਚੀਜ਼ਾਂ ਬਣਾ ਲੈਂਦੇ ਲੋਕ ਇੱਦਾਂ ਲੈ ਜਾਂਦੇ ਨੇ ਠੀਕ ਹੈ ਪਰ ਉਹਨੂੰ ਵਿਕਦੇ ਨੇ ਇੱਕੋ ਨਾਮ ਤਾਨਾ ਜਿਹੜਾ ਆਪਣੀ ਕਿਸਮ ਦਾ ਵੱਖਰਾ ਹੈ ਜਿਹੜਾ ਚੋਰ ਔਰ ਤਸਕਰ ਬਣੀ ਡੇੜੇ ਆਉਂਦਾ ਉਹ ਚੋਰ ਦਾ ਤਸਕਰ ਨਾਲੋਂ ਹੁੰਦਾ ਉਹ ਡੇੜੇ ਹੀ ਹੁੰਦੇ ਇਸ ਧਨ ਕੋ ਤਸਕਰ ਜੋ ਨਾ ਸਕੇ ਹੀ ਚੱਕਾ ਲੈ ਜਾਏ ਕੋ ਹਟਾ ਨਾ ਹੁੰਜਣ ਵਾਲੇ ਨੇ ਠੀਕ ਹੈ ਵਾਲੇ ਨੇ ਜਮ੍ਹਾਂ ਵਾਲੰਤੀ ਪਾਈ ਰੱਖਣ ਵਾਲੇ ਨੇ ਹੂੰ ਉਹਨਾਂ ਨਾਲ ਇਹ ਇਸ ਕਰਕੇ ਪ੍ਰੈਕਟਿਸ ਦੇ ਵਿੱਚ ਰਹੁ ਉਸ ਵਿਸ਼ੇ ਦੀ ਪ੍ਰੈਕਟਿਸ ਦੇ ਵਿੱਚ ਰਹੁ ਤੁਹਾਨੂੰ ਤੁਹਾਨੂੰ ਉਹ ਦੀ ਨੌਲੇਜ ਵੱਧਦੀ ਰਹਿੰਦੀ ਆ ਪ੍ਰੈਕਟਿਸ ਛੱਡ ਦੋ ਭੁੱਲ ਜਾਂਦਾ ਵਿਸ਼ਾ ਇਹ ਭੁੱਲਦਾ ਹੈ ਸਵੇਰੀ ਚਾਹੇ ਲੋਕ ਲੋ ਇਹ ਤਾਂ ਭੁੱਲਦਾ ਕਿਉਂਕਿ ਇਹਦੀ ਰੀਲ ਆਪੇ ਚੱਲੀ ਜਾਂਦੀ ਐ ਅੰਦਰ ਇਹਦੀ ਚਾ ਵਿਚਾਰ ਆਪੇ ਚੱਲੀ ਜਾਂਦੀ ਐ ਇਹ ਕੋਈ ਯੱਪ ਬਣਾਲਾ ਹੈ ਇਹਦੀ ਕਦੇ ਹੋਰ ਪਾਸੇ ਧਿਆਨ ਨਹੀਂ ਜਾਣ ਦਿੰਦਾ ਇਹ ਬਿਸ਼ਾ ਇਹ ਬਿਸ਼ਾ ਬਣਾਲਿਆ ਜਿਹਦਾ ਬਿਸ਼ਾ ਨਾਮ ਤਰ ਬਣ ਗਿਆ ਜਿਹਦਾ ਬਿਸ਼ਾ ਨਾਮ ਵਿਚਾਰ ਬਣ ਗਈ ਗਿਆਨ ਵਿਚਾਰ ਜਿਹਦਾ ਬਿਸ਼ਾ ਬਣ ਗਿਆ ਉਹਦਾ ਧਿਆਨ ਹੋਰ ਪਾਸੇ ਜਾਂਦਾ ਹੀ ਨਹੀਂ ਹੈ ਇਸ ਕਰਕੇ ਉਹ ਗਾਂ ਦੇ ਗਾਂ ਧਨ ਹੀ ਜਾਂਦਾ ਇਹ ਆਉਣ ਜਾਣ ਨਹੀਂ ਹੈ ਜਾਣ ਜਾਣ ਹੈ ਆਉਣ ਨਹੀਂ ਹੈ ਦੁਆਰਾ ਜਾਣ ਦਾ ਲਵਰ ਦਾ ਜਾਣ ਲਵਰ ਦਾ ਭੇਦ ਪੜੋ ਜਦੋਂ ਜਾਣ ਕੇ ਤਾਂ ਇਹਦੇ ਚ ਭੇਦ ਕੀ ਹੈ ਇਹਦੇ ਚ ਵੀ ਸ਼ਬਦ ਭੇਜਦਾ ਹੈ ਜਾਣ ਦਾ ਵਾਦ ਅੱਗੇ ਤੋਂ ਅੱਗੇ ਤਾਂ ਜਾਂਦਾ ਹੈ ਮੇਰਾ ਬੀਤੂ ਨੂੰ ਝੋੜਣਾ ਬੇ ਵੱਧੋ ਜਾਈ ਅੱਗੇ ਅੱਗੇ ਵਧਦਾ ਤਾਂ ਹੈ ਆਕਾਸ਼ਾਂ ਪਤਾਲਾ ਚ ਸਾਰਿਆਂ ਚ ਫੈਲਦਾ ਹੈ ਪਰ ਥੱਲੇ ਰੋਣੇ ਵਾਪਸ ਰੋਣੇ ਉਹਦਾ ਥੱਲੇ ਰੂੜੀ ਆਉਂਦਾ ਬਾਕੀ ਦਾ ਜਿਆ ਦੁਆ ਸਰੀਰ ਜਾਣਾ ਦੋ ਹੱਥ ਹੋ ਗਏ ਇਹ ਹਰ ਤਨ ਨਾਲ ਜਾਏ ਪੂਰੇ ਗੁਰ ਤੇ ਪਾਈ ਹੈ ਮਨਮੁਖ ਪੱਲੇ ਨਾ ਪਾਏ ਇਹ ਜੀ ਦੇ ਨਾਲ ਰਵ ਰਿਹਾ ਜੀਐ ਉਹਦੇ ਨਾਲ ਇਸ ਤਰੀਕੇ ਨਾਲ ਰਵਿਆ ਹੋਇਆ ਜਿਵੇਂ ਪਾਣੀ ਦੇ ਵਿੱਚ ਦੁੱਧ ਪਾ ਦਈਏ ਦੁੱਧ ਜੇ ਪਾਣੀ ਪਾ ਦਈਏ ਨਾ ਫਿਰ ਉਹ ਨਿਕਲਦਾ ਨਹੀਂ ਰਾਬਰ ਗਿਆ। ਲੈਣ ਪਏ ਉਹ गोविंद ਸਿਆਣ ਚੋਪਾਣੀ ਤੇ ਸੁਪਾਣੀ। ਪੋਲੀ ਦਾ ਪਾਣੀ ਗੁਲ ਗਿਆ। ਕਰੋੜਾਂ ਰੱਖ ਕੇ ਵੀ ਗਰਮ। ਉਹਦਾ ਜਾਏ। ਜੀ ਦੇ ਜਾਂਦਾ। ਠੀਕ ਹੈ ਜੀ। ਇਹ ਹਦ ਨਹੀਂ ਵੱਖਰਾ ਦੀ ਹਸਣਦਾ। ਪੂਰੇ ਗੁਰ ਤੇ ਪਾਈ ਹੈ ਮਨਮੁਖ ਪੱਲੇ ਨਾ ਪਾਈ। ਪੂਰੇ ਕੁਰਤੇ ਪਾਏ ਤੇ ਇਹ ਪ੍ਰਾਪਤੀ ਇਦਾਂ ਨਹੀਂ ਹੋ ਜਾਂਦੀ। ਇਹ ਬਥੇਰੇ ਤੋਰੇ ਫਿਰਦੇ ਨੇ ਸੰਤ ਦਵਾਨੀ ਗਾਜ ਵਾਲੇ। ਆਹ ਹੁਣ ਤਾਂ ਉਹ ਨਾਲ ਲੈਣ ਲੱਗ ਗਏ ਪਹਿਲਾਂ ਸਵਾਦੀ ਗਾਜ ਵਾਲੇ ਨੂੰ। ਆਹ ਤੋਂ ਸਸਤਾ ਦਵਾਨੀ ਗਾਜ ਵਾਲਾ ਕੱਪੜਾ ਹੁੰਦਾ ਸੀ ਅੱਗੇ। ਦਵਾਨੀ ਗਾਜ ਵਾਲੇ ਸੰਤ ਨੇ। ਸਮਝਿਆ? ਇਹ। ਫਿਰਦੇ ਨੇ ਜਿਨ੍ਹਾਂ ਇਹ ਜਾਦਾ ਤੋਰੇ ਫਿਰਦੇ ਨੇ ਉਹਦੀ ਉਹ ਸਿੱਖੀ ਦੀ ਟੋਕ ਫਲ ਜਾ ਰਹੀ। ਹੂੰ। ਇਹਦਾ ਮਤਲਬ ਹੈ ਸੰਤਾਂ ਨੇ ਖੁਦ ਸੰਤ ਦਾ ਫਾਲ ਚੜ੍ਹਿਆ ਇਹਾਂ ਦੀ ਸਿੱਖੀ ਖੁਦ ਹੀ ਸਿੱਖਦੀ ਹੁੰਦੀ ਹੈ ਸਿੱਖੀ ਦਾ ਖੁਦ ਗਿਆਨ ਹੀ ਲੋਕੋ ਜੇ ਸਿੱਖੀ ਦਾ ਗਿਆਨ ਖੁਦ ਕੋਲ ਹੁੰਦਾ ਤਾਂ ਸਿੱਖਾਉਣ ਵਰ ਵੀ ਗੰਨੇ ਦੇ ਸਾਲਾ ਗੰਨਾ ਸੁੱਕ ਇੱਕ ਨਿਕਲਦੀ ਸਾਰਾ ਖੇਤ ਵੀੜੇ ਤੇ ਰਸਾਈ ਦੀ ਆ ਨਿਕਲਦਾ ਜੰਨੇ ਜੋ ਤਾਂ ਗੁਰਦਾ ਤਾਂ ਬਣ ਜੇ ਰਸਾ ਨਿਕਲ ਇਹਾਰੇ ਸਭ ਸੁੱਕੇ ਨੇ ਨਾਵਦੀਆ ਵਿਚਾਨ ਦੇ ਨਾਵਲਾਸਨੀ ਹੈ ਇਹਨਾਂ ਨੂੰ ਸਾਰਿਆਂ ਨੂੰ ਪੀੜ ਲੋ ਪਾਈਆ ਗੋਲੀ ਵਰਨਾਣਾ ਜੋ ਦੇਖ ਲੋ ਕੇ ਫੇਰ ਕਰਕੇ ਲਾਇਆ ਉਹ ਇੱਕ ਸ਼ਬਦ ਵਿਚਾਰ ਤਾਂ ਕਰਕੇ ਦੇਖਣ ਪਤਾ ਤਾਂ ਇਹਨਾਂ ਜੁਰਦਾਨ થાય ਕਿ ਦਾ ਨਿਕਲਣਾ ਕਿਸੇ ਗੋਲ ਪੂਰੇ ਗੁਰ ਤੇ ਪਾਈਏ ਪੂਰਾ ਗੁਰ ਹੋਵੇ ਤਾ ਪ੍ਰਾਪਤੀ ਹੈ ਸੰਸ ਦੀ ਪੂਰਾ ਗੁਰਗਾਂ ਉਹਦਾ ਪੂਰਾ ਹੁੰਦਾ ਗੁਰਬਾਣੀ ਜੋ ਇਹ ਨੂੰ ਸਮਝ ਜਾਉਂਦੀ ਹੈ ਆਪ ਇਸ ਬਾਣੀ ਕਿੱਤ ਹੋ ਕੇ ਹਮੇਸ਼ਾ ਵਾਸਤੇ ਰਹਿੰਦਾ ਹੈ ਹਮੇਸ਼ਾ ਲਈ ਇੱਕ ਬਾਣੀ ਕਿੱਤ ਹੋ ਜਾਂਦਾ ਹੈ ਨਾ ਆਦਮੀ ਹਾਂਜੀ ਜਦੋਂ ਸਿੱਖ ਫਿਰ ਇਹ ਨੂੰ ਗੁਰਬਾਣੀ ਜੋ ਆਪੇ ਸਭ ਚਾ ਜਾਂਦਾ ਹੈ ਹੂੰ ਗੁਰਬਾਣੀ ਤਾਂ ਹੈਗਾ ਹੀ ਹੈ ਪਾਈਆ ਲਾਹ ਪਾਈਆ ਛੇ ਕਿਸੇ ਨੇ ਗੁਰਬਾਣੀ ਜੋ ਪ੍ਰਾਪਤ ਕੀਤਾ ਪੂਰਾ ਗੁਰ ਆਪ ਹੋਇਆ ਰਿਹਾ ਦੁਬਾਰਾ ਤੁਫੇੜੀਏ ਤੁਫੇੜ ਜਾਂ ਜਾਦੂਰੀਆ ਜਾਂ ਮਾਇਆ ਦਾ ਪ੍ਰਭਾਵ ਹੋ ਜਵੇ ਜਾਂ ਲੋਭ ਪੈਦਾ ਹੋ ਜਵੇ ਜਾਂ ਲੋਭ ਲਹਿਰ ਚੱਲ ਜਵੇ ਨੱਚ ਤਰ ਮੰਤੋਜਣ ਮਨ ਵਿੱਚ ਕੋਈ ਦੂਜੀ ਇੱਛਾ ਪੈਦਾ ਹੋ ਜਵੇ ਹੋਰ ਨਾਮ ਤੇ ਬਿਨਾ ਹੋਰ ਭੁੱਖੇ ਹੀ ਦੀ ਕੋਈ ਜੀਵ ਲੋਭ ਤੇ ਬੱਲੇ ਪੈ ਜਾਂਦਾ ਉਹਦੇ ਬਿਨਾ ਬੱਲੇ ਨਹੀਂ ਪੈਦਾ ਅਜਿਹੀ ਪਿਆ ਨਾ ਪਵੇ ਦਾ ਪਿਆ ਸੰਤਾ ਜੀ ਕੋਈ ਇਹੋ ਜਿਹਾ ਹੈ ਦੀ ਠੀਕ ਹੈ ਨਹੀਂ ਆ ਪਾਈਏ ਦਾ ਸਮਝਾਓ ਵੀ ਪੂਰੇ ਗੁਰ ਤੇ ਪਾਈਏ ਕਹਿੰਦਾ ਭਾਬੀ ਪ੍ਰਾਪਤੀ ਪ੍ਰਾਪਤੀ ਹੁੰਦੀ ਹੈ ਪੂਰੇ ਰੂਪ ਤੇ ਮਾਇਬੁੱਧ ਪ੍ਰਾਪਤ ਹੋ ਰਿਹਾ ਕਿਉਂਕਿ ਉਹ ਨੂੰ ਕਹਿਦੀ ਭੁੱਖੇ ਹੈ ਮਨਮੁਖਾ ਆ ਮਨਮੁਖਾ ਤੇ ਕੋਟਾ ਕਹਿਦੀ ਉਹ ਵੀ ਤਾਂ ਤਾਂ ਜੇ ਉਹਨੂੰ ਭੁੱਖ ਹੋਵੇ ਸਾਜੇ ਲਿਖਣ ਦਾ ਐਦਾ ਬਨਮੁਖ ਬਣ ਗੁਰੂ ਛੱਦ ਮਹਾਪੁਰਜ ਬਣਿਆ ਬਸ ਮਹਾਪੁਰਜ ਐਦਾ ਬਨਮੁਖ ਠੀਕ ਹੈ ਉਹਦੇ ਕੋਲ ਨਹੀਂ ਹੁੰਦਾ ਉਹਦੇ ਕੋਲ ਨਹੀਂ ਹੁੰਦਾ ਤੇ ਕਹਿ ਸਕਦੇ ਹਾਂ ਠੀਕ ਹੈ ਜੀ ਧੰਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧੰਨ ਖੱਟਿਆ ਆਈ ਇਹਨਾਂ ਨੇ ਨਾਮ ਤਾਂ ਖੱਟ ਲਿਆ ਉਹ ਤਾਂ ਤੁਹਾਨੂੰ ਨੇ ਦੂਜੇ ਗੌਰ ਨੇ ਸਿੱਕਾ ਜੀਵਿਆ ਜਿਤ ਖਾਏ ਵਧਾਇਆ ਪੇਟ ਕਹਾ ਕੇ पेट ਵਧਾਇਆ ਜੀ ਇਹਨਾਂ ਨੇ ਨਾ बड़े ਬੜੇ ਸੰਤ ਬਣ ਕੇ फटे ਫੜੇ ਉਹਨਾਂ ਦੇ ਜਉਣ ਦਾ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗ ਜਿਸ ਕੇ ਵਸ ਹੈ ਸਭ ਤਿਸ ਕਾ ਚੀਰਾ ਦੁਨੀਆ ਦਾ ਸਾਹਿਬ ਅਤ ਵੱਡਾ ਉਹ ਮੇਰਾ ਸਾਹਿਬ ਹੈ ਜਿਹੜਾ ਮੇਰਾ ਸਾਹਿਬ ਹੈ ਹੱਥ ਵੱਡਾ ਜੁਮੇ ਜਦਾ ਦਾ ਅੰਤਿਓਨ ਕੋਈ ਬਲਾਅ ਦੁਨੀਆ ਬੋਲੀ ਜਾਵੇ ਅਰਜੋਈਆਂ ਕਰੀ ਜਾਵੇ ਦਸਾਂ ਕਰੀ ਜਾਵੇ ਕਦੇ ਕਿਸੇ ਸੁਣਦਾ ਦੇਖਿਆ ਕਦੇ چلਤੇ ਆਪ ਦਾ ਹੁਲਾ ਦੇਖਿਆ ਕਦੇ ਕਿਸੇ ਨੂੰ ਦੇਖਿਆ ਕਬੀਰ ਵੀ ਇਹ ਅਰਾਜ ਕਹਿੰਦਾ ਕਿ ਫਿਰ ਠੀਕ ਹੈ ਜੀ ਜਿਹੜੇ ਰਾਜੇ ਝੂਠੇ ਨੇ ਰਾਜਾ ਸਾਡ ਸਭ ਹੈ ਸਭ ਤਿਸਕਾ ਚੀਰਾ ਸਾਰੇ ਜੰਗ ਔਰ ਕਾਇਆ ਦੀ ਕਿਰਨ ਸਾਬਤ ਕਿਤੇ ਨਹੀਂ ਹੁੰਦਾ ਭਗਤਾਂ ਨੂੰ ਸਭ ਜਗ ਉਹਦੇ ਬਸ ਵਿੱਚ ਜੀਦਾ ਹੈ ਭਗਤ ਦੇਖ ਰਿਹਾ ਹੈ ਨਾ ਸਾਰਾ ਜਗ ਔਰ ਵੀ ਰਹੇ ਨੇ ਪਰ ਲੋਕਾਂ ਕੋਈ ਪਤਾ ਨਹੀਂ ਉਹ ਦਾਵਾ ਨਹੀਂ ਕਰਦਾ ਗੈਰਗ੍ਰਹਿ ਹੈ ਨਾਲ ਉਹ ਹੋਸਟਲ ਦੀ ਲਾਉਂਦਾ ਕਿਤੇ ਸੜਕਾਂ ਤੇ ਜਗ ਤੋਂ ਕੀ ਬਾਹਰ ਬਣਦਾ ਜੀ ਜਗ ਸਦਾ ਮਾਇਆ ਮਤਲਬ ਕਿ ਆ ਕੀ ਹੈ ਕੋਸ਼ਲੀ ਚਾਹ ਉਹ ਬਾਤ ਜੇਦਾਂ ਨਾਲ ਜਲ ਜਿੱਦਾਂ ਵੀ ਐ ਅੱਜ ਸਰਚ ਜਦ ਜੇ ਤਦ ਜਗ ਉਹ ਅਜਾਪਾ ਕਹਿੰਨੇ ਇਹ ਜਗ ਸੱਚਾ ਕੀ ਹੈ ਕੋਠੜੀ ਉੱਤੇ ਹਿਰਦੇ ਦੀ ਗੱਲ ਨਹੀਂ ਕਰਦੇ ਨਹੀਂ ਉਹ ਦੀ ਗੱਲ ਕਰਦੇ ਅੱਛਾ ਇਹ ਜਗ ਸੱਚਾ ਕੀ ਹੈ ਕੋਠੜੀ ਸਭ ਜਗ ਤਿਸਕਾ ਤਿਸਕਾ ਚੀਰਾ ਸਭ ਤੇ ਚੀਰਾ ਉਹਦਾ ਹਿੱਸਾ ਹੈ ਹੂੰ ਉਹਦੇ ਹਿੱਸਾ ਹੈ ਉਹਦੇ ਵਿੱਚ ਹੀ ਆ ਉਹਦੇ ਅੰਦਰ ਹੀ ਆ ਸਭ ਉਹ ਭਵਖਾ ਕਰ ਉਹਦੇ ਅੰਦਰ ਹੀ ਆ ਉਹਦਾ ਚੀਜ਼ਾ ਹੀ ਆ ਉਹਦੇ ਅੰਦਰ ਹੀ ਆ ਕੋਈ ਤੇ ਵੱਖਰੀ ਪਾਈ ਹੈ ਨਿਹਚਲ ਧਨ ਧੀਰਾ ਗਿਆਨ ਦੀ ਕਿਰਪਾ ਨੂੰ ਪ੍ਰਾਪਤ ਹੁੰਦੀ ਹੈ ਨਿਹਚਲ ਧਨ ਧੀਰਾ ਤੀਰ ਜਵਾਨ ਜਿਹੜੇ ਬੱਤੇ ਨੇ ਉਹਨਾਂ ਨੂੰ ਪ੍ਰਾਪਤ ਹੁੰਦਾ ਤੀਰ ਜਿਹਾ ਰੱਖਦੇ ਤਵਰ ਰਖਦੇ ਨੇ ਸੰਤੋਗ ਰਖਦੇ ਨੇ ਪ੍ਰਾਪਤ ਹੋ ਜੂਗਾ ਇਹਨਾਂ ਦਾ ਬੋਲ ਕਾਲਾ ਪੈਣ ਲੱਗੇ ਉਹ ਫਿਰ ਵਿਚਾਲੇ ਛੱਡ ਜਾਂਦੇ ਨੇ ਪੀੜਿ ਚ ਰਖਦੇ ਨੇ ਵੀ ਬਿਲੂਗਾ ਦੂਗਾ ਆਸ ਰਖਦੇ ਨੇ ਧਰੋਸਾ ਰਖਦੇ ਨੇ ਉਹਨਾਂ ਨੂੰ ਮਿਲ ਜਾਂਦੇ ਹੋਰ ਹਤੇ ਹਰ ਮਨਵਸੈ ਕਿਰਪਾ ਹੋਵੇ ਤਾਂ ਆਦਾ ਕਿਰਪਾ ਅਸਲ ਦੇ ਵਿੱਚ ਖੇਚਲਾ ਇਹ ਆਪਣੇ ਤੇ ਕਿਰਪਾ ਕਰੇ ਤਾਂ ਖੁਦਾਰ ਛੱਡ ਦੇ। ਉਹ ਛੱਡ ਦੇ। ਹੂੰ ਹੂੰ। ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਛੱਡ ਕਰ ਦੇ ਆਲੀ। ਕਾਲ ਨੂੰ ਕਹਿ ਦੇ ਭਾਈ ਥਲ ਚਲੇ ਜਾਓ ਸਾਡੇ। ਅੱਛਾ। ਨੂੰ ਤਾਂ ਬਾਹੀਂ ਬੈਠਾ ਯਾਰ। ਆਮ ਗੋਲ ਲੋਭ ਮੋਹ ਘਰਮ ਦਾ ਬਾਹੀਂ ਬੈਠਾ ਝੋਪੀਦਾਰ। ਇਹਨਾਂ ਨੂੰ ਕੱਢ ਦੇ ਸਾਰਿਆਂ ਨੂੰ। ਇਹਾਂ ਇਹਨਾਂ ਨਾਲ ਉਹ ਬਗਾਵਤ ਫਿਰ ਕਦੇ ਬੇਇੱਜ਼ਤੀ ਕਰ ਕਰੇ ਸਾਫ ਫਿਰ ਉਹਦੀ ਵੀ ਕਿਰਪਾ ਹੁੰਦੀ ਹੈ ਪਰ ਬੇਸ਼ੱਕ ਦੀ ਪਿਛਲੀ ਗਲਤੀਆਂ ਸਾਰੀਆਂ ਠੀਕ ਹੋ ਬੰਦਾ ਵਧੀਆ ਹੋ ਗਿਆ ਹੁਣ ਕੋਣੇ ਦੀ ਆਸੂਰੀ ਕਰ ਲਈ ਫਿਰ ਉਹ ਕਿਰਪਾ ਕਰਦਾ ਜਿਹੜਾ ਭੇਟ ਲੈਂਦਾ ਗੁਰਸੂਰਾ ਫਿਰ ਉਹ ਗੁਰਸੂਰਾ ਕੌਣ ਹੈ ਹੈ ਤਾਂ ਸਤਗੁਰੂ ਉਹ ਸੋਦਾ ਜਿਵੇਂ ਛੇਰ ਫਿਰਦਾ ਉਹਨਾਂ ਦੇ ਵਿੱਚ ਛੇਰ ਠੀਕ ਹੈ ਜਿਵੇਂ ਅੰਦਰ ਤੋਂ ਫਿਰਦਾ ਛੇਰ ਮੋਂ ਛੇਰ ਫਿਰਦਾ ਵੀ ਆ ਕੇ ਗਿਆ ਚਰਚਾ ਕਰਨ ਸੂਰਾ ਉਹਨੂੰ ਕਹਿੰਦੇ ਕਿਨੂੰ ਕੋਈ ਹਰਾਏ ਸਕਦਾ ਗਿਆਨ ਚਰਚਾ ਤੇ ਭੇਟਣ ਦਾ ਕੀ ਭੇਟਣਾ ਭੇਟੋੜਾ ਨਾ ਨੂੰ ਬਲਾਉਣ ਭੇਟ ਦਾ ਸ਼ਬਦ ਨਾ ਹੁੰਦੀ ਇਹਨਾਂ ਸੋਟੇ ਸ਼ਬਦ ਦਾ ਭੇਲ ਜਾਂ ਹੁੰਦਾ ਹੈ ਪੇਟੇ ਕੋਈ ਹੁੰਦਾ ਹੀ ਆ ਉਹ ਅੱਛਾ ਸੂਰਾ ਲਫ਼ਜ਼ ਦਾ ਮਤਲਬ ਹੈ ਉਹ ਰੂਪ ਕਹਿੰਦਾ ਮਤਲਬ ਹੈ ਜਿਦਿ ਭੇਡ ਹੋ ਜਾਂਦੀ ਐ ਸੁਰਤ ਸ਼ਬਦੀ ਸੂਰਾ ਕਿਉਂ ਆ ਹੋ ਉਹ ਸੂਰਾ ਕਿਉਂ ਕਿਹਾ ਹੋਰ ਅਜ ਤੈ ਨਹੀਂ ਕੋਈ ਜਿੱਤ ਸਕਿਆ ਗਵਾਹ ਜਿਦੇ ਦੇ ਵਿੱਚ ਜਿਹੜਾ ਦੇ ਵਿੱਚ ਜਿਹੜਾ ਇਹਨਾਂ ਦਾ ਠੀਕ ਹੈ ਜੀ ਗੁਣਵੰਤੀ ਸਲਾਹਿਆ ਸਦਾ ਫਿਰ ਨਿਸ਼ਚਲ ਹਰ ਪੂਰਾ ਗੁਣਵੰਤੀ ਉਹ ਜਿਹਨਾਂ ਦੇ ਕੋਲ ਦੇ ਕੁਣ ਵਾਲੇ ਕੁਣਾ ਵਾਲੇ ਗੁਰੂ ਤੇ ਗੁਰੂੰਤਿ 30 ਸਾਲ ਆਇਆ ਗੁਰੂ ਤੇ ਆਨੇ ਸਿੱਖ ਸਿਲਾ ਕੀਤੀ ਹੈ ਕੀ ਦੀ ਸੱਚ ਦੀ ਬਾਕੀ ਜ਼ਬਤਾ ਲਿਖਣ ਵਾਲੇ ਸਿਫਤਿ ਸ਼ਾਸਨ ਲਿਖਣ ਵਾਲੇ ਹੋਰ ਕਿਤਾਬਾਂ ਲਿਖਣ ਵਾਲੇ ਤੇਰੇ ਨੇ ਆਦਮੀ ਸਿਫਤ ਕੀਤੀ ਹੈ ਕੋਈ ਕਹਿੰਦਾ ਈਸਾ ਦੇ ਇਮਾਨ ਲੈ ਕੋਈ ਕਹਿੰਦਾ ਮੂਬੂ ਸਾਹਿਬ ਦੇ ਇਮਾਨ ਲੈ ਆਦਮੀ ਦੇ ਜੰਬੇ ਤੇ ਫਿਰ ਇੱਥੇ ਕੋਈ ਨਹੀਂ ਕਹਿੰਦਾ ਨਾਨਕ ਤੇ ਮੋ ਲਓ ਨਾ ਨੂੰ ਕਹਿਣਾ ਪਰਮੇਸ਼ਰ ਸੱਚ ਦੇ ਸੱਧਿਆਰੇ ਬਣੋ ਠੀਕ ਹੈ ਜੀ ਪਰਮੇਸ਼ਰ ਦੇ ਹੁਕਮ ਚੱਲੋ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲੋ ਸੱਚ ਦੇ ਪਹਿਰਾਦਾ ਉਸ ਜਿਹੜਾ ਸਦਾ ਹੈ ਦੇਚਲ ਹੈ ਹਾਰੇ ਅੱਛਾ ਜੀ ਬਾਕੀ ਦੱਸੋ ਕਿਹੜੇ ਗ੍ਰੰਥ ਦਾ ਵਿਸ਼ਾ ਹੈ ਇਹ ਕਿਸੇ ਗ੍ਰੰਥ ਦਾ ਵਿਸ਼ਾ ਹੀ ਬਾਈਬਲ ਦਾ ਵਿਸ਼ਾ ਹੀ ਨਹੀਂ ਹੈ ਇਹ ਦਾਦਾ ਵਿਸ਼ਾ ਹੀ ਨਹੀਂ ਹੈ ਜੇਰ ਗਿਆਨ ਵਿਸ਼ਾ ਹੀ ਨਹੀਂ ਹੈ ਰਾਮਾਇਣ ਵਾਹ ਪਾ ਦਾ ਵਿਸ਼ਾ ਹੀ ਨਹੀਂ ਹੈ ਹਰ ਪੂਰਾ ਕਿਹਨੂੰ ਕਹਿੰਦੇ ਆ ਜੀ ਹਰ ਪੂਰਾ ਉਹ ਹੈ ਜਿਹਦਾ ਜਿਤਵਾਂ ਇੱਕ ਹੈ ਹਰ ਦਾ ਹੀ ਮਾਨ ਆਪਣਾ ਮਨ ਜਿੱਤ ਲਿਆ ਜਿਹਨੇ ਆਪਣਾ ਮਨ ਜਿੱਤ ਲਿਆ ਹਰ ਪੂਰਾ ਉਹ